ਪਰਿੰਦਰ ਸਿੰਘ ਜੀ ਲੁਧਿਆਣਾ ਵਾਲਿਆਂ ਨੇ ਹੋਰ ਵੀ अनेका ਸਿੱਖਾਂ ਨੇ ਉੱਥੇ ਜਿਨ੍ਹਾਂ ਦਾ ਮੈਨੂੰ ਨਹੀਂ ਜਾਣਕਾਰੀ ਕਿੰਨਾ ਕਿੰਨਾ ਨੇ ਯਤਨ ਕੀਤੇ ਹੋਣਗੇ ਸੱਚੇ ਪਾਤਸ਼ਾਹ ਜੀ ਦੇ ਹੁਕਮ ਅਨੁਸਾਰ ਉਹ ਕੇਸ ਆਪਣੇ ਹੱਕ ਵਿੱਚ ਹੋ ਗਿਆ ਤੇ ਲੁਧਿਆਣਾ ਵਿੱਚ ਜਿਹੜੀ 5 ਏਕੜ ਜਗ੍ਹਾ ਜਿਹੜੀ ਕਰੀਬ 25-30 ਕਰੋੜ ਦੀ ਜਗ੍ਹਾ ਹੈਗੀ ਆ ਉਹ ਵੀ ਜੇ ਸੱਚੇ ਪਾਤਸ਼ਾਹ ਜੀ ਉਹਨੂੰ ਕਮਰਸ਼ੀਅਲ ਪੁਆਇੰਟ ਤੋਂ ਵਰਤਣਾ ਚਾਹੁੰਦੇ ਤੇ ਕਿੰਨੇ ਹੀ ਆਮਦਨ ਵਾਲਾ ਥਾਂ ਹੈ ਪਰ ਸੱਚੇ ਪਾਤਸ਼ਾਹ ਜੀ ਹੁਕਮ ਕੀਤਾ ਕਿ ਉੱਥੇ ਹਸਪਤਾਲ ਬਣਾਉਣਾ ਦੇ ਤੁਹਾਨੂੰ ਪਤਾ ਹੈ ਕਿ ਜੇ ਐਡਾ ਵੱਡਾ 300 ਬੈੱਡ ਦਾ ਹਸਪਤਾਲ ਬਣਾਉਣਾ ਹੈ ਤੇ ਉਹ 1 2 4 5 7 ਕਰੋੜ ਵਾਲੀ ਗੱਲ ਨਹੀਂ ਹੁੰਦੀ ਉਹ ਕਰੀਬ 80 90 ਜਾਂ 100 ਕਰੋੜ ਤੱਕ ਦਾ ਖਰਚਾ ਹੋਣਾ ਉਹ ਭਾਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਇਰਜ਼ਾ ਹੋਵੇ ਤੇ ਉਹਨਾਂ ਵਾਸਤੇ ਇਹ ਵੀ ਇੱਕ ਛੋਟੀ ਜੀ ਗੱਲ ਹੈ ਜਿਹੜੇ ਇੱਕ ਸਾਰੀ ਸ੍ਰਿਸ਼ਟੀ ਨੂੰ ਦੇ ਸਕਦੇ ਨੇ ਉਹ ਆਪਣੀ ਇਰਜ਼ਾ ਨਾਲ ਆਪ ਵੀ ਬਣਾ ਸਕਦੇ ਨੇ ਪਰ ਸੱਚੇ ਪਾਤਸ਼ਾਹ ਜੀ ਦੀ ਇਰਜ਼ਾ ਵੀ ਇਹੋ ਜੇ ਸਾਰੇ ਕਾਰਜਾਂ ਵਿੱਚ ਤੁਹਾਡਾ ਸਹਿਯੋਗ ਜਿਹਦੇ ਨਾਲ ਤੁਹਾਡੀ ਵੀ ਮਾਇਆ ਪਵਿੱਤਰ ਹੋਵੇ ਤੇ ਇਹ ਮਾਇਆ ਜਿਹੜੀ ਆਪਣੇ ਕੋਲੇ ਐ ਇਹਨੂੰ ਆਪਾਂ ਆਪਣੀ ਨਾ ਸਮਝੀਏ ਤੇ ਤਾਂ ਹੀ ਅਸੀਂ ਇਹ ਜੜ ਮਾਇਆ ਦੇ ਮੋਹ ਵਿੱਚੋਂ ਨਿਕਲ ਸਕਦੇ ਆ ਤੇ ਬਸ ਇੰਨਾ ਹੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੁਕਮ ਕਰ ਦੇਣ ਤੇ ਇਹ ਮਾਇਆ ਅਸੀਂ ਉਹਨਾਂ ਦੇ ਭੇਟ ਕਰ ਦੇਈਏ ਤੇ ਇਹ ਮਾਇਆ ਨੂੰ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇ ਤੇ ਉਹ ਹਸਪਤਾਲ ਵਾਸਤੇ ਵਰਦ ਦੇਣ ਤੇ ਉਸ ਤਰ੍ਹਾਂ ਹੀ ਠੀਕ ਐ ਪਰ ਜੇ ਸੱਚੇ ਪਾਤਸ਼ਾਹ ਜੀ ਨੂੰ ਚੁੱਕ ਕੇ ਕਿਸੇ ਖੂਹ ਵਿੱਚ ਸੁੱਟ ਦੇਣ ਤੇ ਸਾਡੀ ਤਾਂ ਵੀ ਸਫਲ ਹੋ ਗਈ ਗੁਰੂ ਗਬਿੰਦ ਸਿੰਘ ਜੀ ਜਦੋਂ ਆਨੰਦਪੁਰ ਤੋਂ ਆਉਣ ਲੱਗੇ ਤੇ ਉਹਨਾਂ ਨੇ ਚੁੱਕ ਕੇ ਮਾਇਆ ਹੁਕਮ ਕੀਤਾ دریا ਵਿੱਚ ਸੁੱਟ ਦਿਓ। ਮਾਤਾ ਜੀ ਨੇ ਅਰਜ ਕੀਤੀ ਕਿ ਆਪ ਜੀ ਇਹਨਾਂ ਸਿੱਖਾਂ ਨੂੰ ਦੇ ਦਿਓ ਸੱਚੇ ਪਾਤਸ਼ਾਹ ਜੀ ਨੇ ਨਾਮ ਪ੍ਰਵਾਨ ਕੀਤੀ ਤੇ ਉਸ ਮਾਇਆ ਵਿੱਚੋਂ ਹੀ ਮਾਤਾ ਜੀ ਨੇ ਹੁਕਮ ਤੋਂ ਬਿਨਾਂ ਜਿਹੜੀ ਕੁਛ ਮਾਇਆ ਨਾਲ ਰੱਖ ਲਈ ਉਹੀ ਤੁਹਾਨੂੰ ਪਤਾ ਫਿਰ ਸਹਬਜ਼ਾਦੇ ਦੀ ਸ਼ਹੀਦੀ ਦਾ ਕਾਰਨ ਬਣੀ। ਜਦੋਂ ਅਸੀਂ ਮਾਇਆ ਜਿਹੜੀ ਸਾਡੇ ਕੋਲੇ ਆਉਂਦੀ ਹੈ ਗੁਰਬਾਣੀ ਵਿੱਚ ਲਿਖਿਆ ਤਨ ਤਨ ਜੇ ਤੋ ਕਉ ਦਿਓ ਤਾਸਿਓ ਨੇਹ ਨਕੀਨ ਅਸੀਂ ਸਮਝਦੇ ਹਾਂ ਕਿ ਇਹ ਸਰੀਰ ਤੇ ਇਹ ਮਾਇਆ ਸਾਡੇ ਯਤਨਾਂ ਨਾਲ ਪ੍ਰਾਪਤ ਹੁੰਦੀ ਹੈ। ਇਹ ਸਾਡੇ ਯਤਨਾਂ ਨਾਲ ਇਹ ਬੱਚੇ ਦਾ ਜਨਮ ਹੋਇਆ ਪਰ ਨਹੀਂ ਇਹ ਜਨਮ ਦੇਣ ਵਾਲਾ ਇਹ ਮਨੁੱਖਾ ਸਰੀਰ ਦੇਣ ਵਾਲਾ ਕੋਈ ਹੋਰ ਹੈ ਉਹ ਸਤਿਗੁਰੂ ਹੈ ਜਿਹਦੀ ਬਖਸ਼ਿਸ਼ ਨਾਲ ਇਹ ਕਾਰਜਾਂ ਵਿੱਚ ਬਰਕਤਾਂ ਪੈਂਦੀਆਂ ਨੇ ਜਿਹਦੀ ਬਖਸ਼ਿਸ਼ ਨਾਲ ਮਨੁੱਖਾ ਜਨਮ ਮਿਲਦਾ ਜਿਹਦੀ ਬਖਸ਼ਿਸ਼ ਨਾਲ ਧੀਆ ਪੁੱਤਰ ਮਿਲਦੇ ਨੇ ਤੇ ਜਦੋਂ ਅਸੀਂ ਉਸ ਹੁਕਮ ਵਿੱਚ ਚੱਲਦੇ ਆਂ ਤੇ ਇਹ ਮਾਇਆ ਸਾਡੇ ਵਾਸਤੇ ਸੁੱਖ ਦਾ ਸਾਧਨ ਬਣਦੀ ਹੈ ਅਸੀਂ ਇਹਦੇ ਵਿੱਚ ਨਾਮ ਹੀ ਲੇਪ ਰਹਿ ਕੇ ਇਸ ਨੂੰ ਵਰਤਦਿਆਂ ਹੋਇਆਂ ਸੁਖ ਲੈ ਸਕਦੇ ਹਾਂ ਜਿੱਦਨ ਹੁਕਮ ਹੋਵੇ ਅਸੀਂ ਜਿੱਦਨ ਸਰੀਰ ਛੱਡਣਾ ਹੈ ਉਸ ਦਿਨ ਅਸੀਂ ਸਾਰੇ ਕੁਝ ਨੂੰ ਸਹਿਜ ਨਾਲ ਛੱਡ ਕੇ ਚਲੇ ਜਾਈਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਲੈਂਦਿਆਂ ਰਹਿੰਦਿਆਂ ਹੋਇਆਂ ਵੀ ਅਸੀਂ ਉਸ ਵਿੱਚ ਵੱਜ ਕੇ ਨਾ ਰਹੀਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਭਾਵੇਂ ਹੁਕਮ ਕਰ ਦਿੰਦੇ ਤੇ ਤੁਹਾਨੂੰ ਹੁਕਮ ਕਰਦੇ ਸਾਰਿਆਂ ਨੂੰ ਕਿ ਤੁਸੀਂ ਇਸ ਵਾਸਤੇ ਭੇਟਾ ਕਰੋ ਤੁਸੀਂ ਉਸ ਤਰ੍ਹਾਂ ਵੀ ਕਰਨਾ ਸੀ ਪਰ ਜਿਵੇਂ ਇੱਕ ਸਿਸਟਮੈਟਿਕਲੀ ਇਸ ਹਸਪਤਾਲ ਵਾਸਤੇ ਕੰਮ ਸ਼ੁਰੂ ਕੀਤਾ ਗਿਆ ਉਹ ਜਿਸ ਤਰ੍ਹਾਂ ਤੁਸੀਂ ਸਾਰੇ ਸਮਝਦੇ ਆ ਇਹਦੇ ਸ਼ੇਅਰ ਤੁਸੀਂ ਖਰੀਦਨੇ ਹੋਣਗੇ ਤੁਸੀਂ ਦੁਨੀਆਵੀ ਤੌਰ ਤੇ ਉਹਦੇ ਵਿੱਚ ਹਿੱਸੇਦਾਰ ਹੋਵੋਗੇ ਇਸ ਹਸਪਤਾਲ ਵਿੱਚ ਇਹ ਲੁਧਿਆਣੇ 5 ਏਕੜ ਜਗ੍ਹਾ ਵਿੱਚ ਇਹ ਹਸਪਤਾਲ ਬਣਨਾ ਸਤਗੁਰੂ ਪ੍ਰਤਾਪ ਸਿੰਘ ਜੀ ਹਸਪਤਾਲ ਤੇ ਤੁਸੀਂ ਉਸ ਵਿੱਚ ਸਾਰਿਆਂ ਨੇ ਸਹਿਯੋਗ ਦੇਣਾ ਹੈ ਆਪਣੀ ਮਾਇਆ ਸਫਲ ਕਰਨੀ ਹੈ ਆਪਣਾ ਜਨਮ ਸਫਲ ਕਰਨਾ ਉਸ ਸ਼ੁਭ ਕਾਰਜ ਵਿੱਚ ਜਿਹੜਾ ਸਤਗੁਰੂ ਸੱਚੇ ਪਾਤਸ਼ਾਹ ਜੀ ਤੁਹਾਨੂੰ ਹੁਕਮ ਕਰਦੇ ਨੇ ਇਹਦੇ ਵਾਸਤੇ ਕੁਝ ਤਕਨੀਕੀ ਗੱਲਾਂ ਟੈਕਨੀਕਲ ਗੱਲਾਂ ਜਿਹੜੀਆਂ ਨੇ ਉਹ ਤੁਹਾਨੂੰ ਦੱਸਣਗੇ ਮਨਚੰਦਾ ਜੀ ਤੇ ਤੁਸੀਂ ਇੱਥੇ ਫਾਰਮ ਲੈ ਕੇ ਉਹ ਫਾਰਮ ਭਰ ਕੇ ਤੇ ਆਪੋ ਆਪਣੇ ਸ਼ੇਅਰ ਆਪੋ ਆਪਣੇ ਹਿੱਸੇ ਇਸ ਹਸਪਤਾਲ ਵਿੱਚ ਪਾਉਣੇ ਨੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਨ ਤੇ ਇਹ ਹਸਪਤਾਲ ਤੇ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਤੇ ਉਹ ਬਣ ਹੀ ਜਾਣਾ ਬਸ ਇੰਨਾ ਹੀ ਕਿ ਅਸੀਂ ਜਿਹੜੇ ਵੀ ਇਸ ਵਿੱਚ ਸਹਿਯੋਗ ਪਾ ਲਵਾਂਗੇ ਉਹਦੇ ਵਿੱਚ ਅਸੀਂ ਆਪਣਾ ਜਨਮ ਸਫਲ ਕਰ ਲਵਾਂਗੇ ਤੇ ਜਨਮ ਸਫਲ ਬਸ ਇਨਾ ਹੀ ਆ ਕਹੇ ਨਾਨਕ ਇਹ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਓ ਚਿਤ ਲਾਇਆ ਬਸ ਇਨੇ ਸ਼ਬਦ ਕਹਿ ਕੇ ਮੈਂ ਖੇਮੰਦ ਆ ਜਾ ਚਖੂਵਾਂਗਾ ਸਤਿ ਸ੍ਰੀ ਅਕਾਲ